multimodal ਆਪਕਾ ਜਾ ਕੇ ਰੋਕੇ ਤਾਂ ਨਹੀਂ ਮਾਨਤਾ ਹੁੰਦਾ ਇੱਥੇ ਤੇ ਕਿਰਪਾ ਯਾਤਰੀ ਦੀ ਇਹਦਾ ਨਾ ਰਿhta ਪਰ ਉਹ ਤੇ ਰਾਖੋ ਤਾਂ ਤੰਤਰੀ ਸਭ ਨੂੰ ਅੱਜ ਸਵੇਰ ਤੋਂ ਹੀ ਸੁਣਿਆ ਬੜਾ ਆਰ ਹੁੰਦਾ ਰਿਹਾ ਮਾਯਾਰ ਕੀਤਨ ਕੀਤਾ ਸਤੂਤ ਦੇ ਵਾਲਿਆਂ ਦੇ ਜੰਦੇ ਨਹੀਂ ਸਵੇਰੇ ਆਸਰ ਕੀ ਆਪ ਹੋਇਆ ਫਿਰ ਸਤੂ ਮਹਾਰਾਜ ਨੇ ਲਗੇ ਪੜ੍ਹੀ ਕਿ ਭਾਈ ਜੁਲਾਹ ਜਿਸ ਤੋਬੇ ਜੇ ਬੜ ਸਿੱਜੇ ਜਰ ਸੋਨੇ ਦਾ ਕੰਮ ਨਾਲ ਉਹ ਵਿਆਖਿਆ ਕਰਕੇ ਦੱਸੀ ਆ ਸਾਨੂੰ ਆਪਣੀ ਪ੍ਰਤੀਕਲ ਲਾਈਫ ਬਣਾਣੀ ਚਾਹੀਦੀ ਹੈ ਫੈਡਿਕਲ ਨਾਲ ਜਿਹੜਾ ਇਹ ਕਦੀ ਸਾਡਾ ਬਾਹਰ ਦਾ ਨਹੀਂ ਕਰ ਸਕਦਾ ਤੇ ਪ੍ਰਤੀਕਲ ਲਾਈਫ ਨਾਲ ਜਾ ਤੱਕ ਸਕਦੀ ਪ੍ਰੈਕਟੀਕਲ ਨੌਲੇਜ ਇੱਥੇ ਤਰ੍ਹਾਂ ਦਾ ਕਿ ਇੱਕ ਆਦਮੀ ਇੱਥੇ ਆਪਣੇ ਦੇਸ਼ ਇੰਡੀਆ ਵਿੱਚ ਆਇਆ ਹੈ। ਉਹ ਵਿਚਾਰਾ ਕਰਦਾ ਹੈ ਕਿ ਅਫਰੀਕਾ ਜਾਣਾ ਤੇ ਬੈਠਾ ਆਪਣੇ ਪਿੰਡ 'ਤੇ ਜਾਂ ਪਾਸਪੋਰਟ ਬੰਦਾ ਗੱਡੀ ਕਰਕੇ ਤੇ ਕੋਈ ਇਹ ਚਲਾ ਜਾਂਦਾ ਤੇ ਕੋਈ ਹਵਾਈ ਜਾਦਰਾ ਚਲਾ ਜਾਂਦਾ ਇਹ ਮਾਰੀ ਵਾਲੇ ਜਾਦਰਾ ਚਾਹੀਏ ਤੇ ਮਵਾਦੇ ਜਾ ਲੱਗੀਦਾ ਤੇ ਜੇ ਹਵਾਈ ਜਾਦਰਾ ਚਾਹੀਏ ਕਈ ਸਿੱਧੇ ਅੱਧੇ ਚਲੇ ਜਾਂਦੇ ਨੇ ਤੇ ਇਸੇ ਤਰ੍ਹਾਂ ਫੇਰ ਉੱਥੇ ਪਹੁੰਚ ਜਾਂਦਾ ਇਹ ਹੈ ਉਹਨੇ ਗੱਲਾਂ ਬਾਤਾਂ ਪੜੀਆਂ ਨੇ ਸਾਰਾ ਕੁਝ ਅਸਲੀ ਪ੍ਰੈਕਟੀਕਲ ਉਹਦੀ ਉਹ ਗੱਲ ਉਦੋਂ ਬਣੇਗੀ ਜਦੋਂ ਸਾਰਾ ਕਮਾੜਾ ਹੋ ਜਾਂਦਾ ਕਹਿਣੀ ਕਰਨੀ ਦੇ ਵਿੱਚ ਫਰਕ ਇੰਨਾ ਹੀ ਹੁੰਦਾ ਕੱਕਾ ਹਾ ਹਾ ਤੇ ਤੈਨੂੰ ਦਾ ਮੂੰਹ ਜਿਹੜਾ ਹੁੰਦਾ ਖੁੱਲਾ ਹੁੰਦਾ ਉਹ ਕਹਿੰਦਾ ਬੜਾ ਪਰ ਕਰਨੀ ਮੂੰਹ ਬੰਦ ਹੋ ਜਾਂਦਾ ਕੱਕਾ ਰਾੜਾ ਨੂੰ ਦੀ ਵਿੱਚ ਹਾਹੇ ਦਾ ਮੂੰਹ ਖੁੱਲਾ ਹੁੰਦਾ ਰਾੜੇ ਦਾ ਮੂੰਹ ਬੰਦ ਹੁੰਦਾ ਜਿਹਨਾਂ ਦਾ ਮੂੰਹ ਖੁੱਲਾ ਹੁੰਦਾ ਮੇਰੇ ਵਰਗਿਆਂ ਦਾ ਠੱਗੜਾ ਦਾ ਉਹਨਾਂ ਦੀ ਕਰਨੀ ਨਹੀਂ ਹੁੰਦੀ ਤੇ ਜਿਹਨਾਂ ਦਾ ਮੂੰਹ ਬੰਦ ਹੁੰਦਾ ਉਹਨਾਂ ਦੀ ਕਹਿਣੀ ਨਹੀਂ ਹੁੰਦੀ ਪਰ ਦੀ ਅਮਲ ਕਰਨਾ ਚਾਰ ਪ੍ਰਕਾਰ ਦੇ ਇਨਸਾਨ ਲਿਖੇ ਹਨ। ਉਹਨਾਂ ਬੜੇ ਸਰੀਆ ਦੀਆਂ ਚਾਰ ਚਾਰ ਲਿਖੀਆਂ ਨੇ ਮੈਂ ਫੇਰ ਕਦੀ ਚਾਹੁੰ ਚਾਹੁੰਦੇ ਲੈਕਚਰ ਕਰਾਂਗਾ। ਚਾਰ ਹੀ ਵੇਦ ਨੇ। ਚਾਰ ਹੀ ਯੁੱਗ ਨੇ। ਇਹ ਚਾਰ ਹੀ ਸਮਝੋ ਗੁਰਮੁਖ ਲਿਖੇ ਨੇ ਸਾਡੇ ਸਰਮੁਖ ਮਨ ਨੂੰ ਕੋ ਬੇਮੁਖ ਤੇ ਗੁਰਮੁਖ ਸਰਮੁਖ ਮਨ ਨੂੰ ਤੇ ਬੇਮੁਖ ਇਹ ਚਾਰ ਪ੍ਰਕਾਰ ਦੇ ਧੰਦੇ ਨੇ ਚਾਰ ਪ੍ਰਕਾਰ ਦੇ ਤਰਖਤ ਨੇ ਤਰਖਤ ਉਹ ਹਨ ਇਹ ਉਹ ਰਖਤ ਨੇ ਫੁੱਲੀ ਲੱਗਦੇ ਨੇ ਤੇ ਫਾਲੀ ਲੱਗਦੇ ਇਹ ਕੋਣ ਨੇ ਜਿਨ੍ਹਾਂ ਨੂੰ ਫੁੱਲ ਵੀ ਲੱਗਦੇ ਨੇ ਤੇ ਫਾਲ ਵੀ ਲੱਗਦੇ ਨੇ ਇਹ ਕੋਣ ਨੇ ਜਿਨ੍ਹਾਂ ਨੂੰ ਫੁੱਲ ਨਹੀਂ ਲੱਗਦਾ ਤੇ ਫਾਲ ਹੀ ਲੱਗਦਾ ਇਹ ਕੋ ਬੰਦੇ ਹਾਂ ਜਿਹੜੇ ਨਾਲ ਗੱਲ ਕਰਦੇ ਨੇ ਤੇ ਨਾਲ ਉਹਦੀ ਕੋ ਕਰਦੀ ਹੁੰਦੀ ਉਹ ਚੁੱਪ ਕਰਕੇ ਰਹਿੰਦੇ ਇੱਕ ਮੇਰੇ ਵਰਗੇ ਉਹ ਨੇ ਜਿਹੜੇ ਗੰਨਾ ਬੋਧੀਆਂ ਕਰਦੇ ਨੇ ਤੇ ਕੰਮ ਨਹੀਂ ਕਰਦੇ ਨਵੇਂ ਗਾਉਂਦੇ ਨੇ ਜਿਹੜੀ ਗੱਲ ਕਰਦੇ ਨੇ ਉਹ ਪੂਰਾ ਕਰਦੇ ਨੇ ਮੁਖਾ ਦੇਂਦੇ ਨੇ ਤੇ ਚੌਥੇ ਹੋਰ ਜਿਹੜੇ ਕਰਦੇ ਬਸ ਹੋਵੇ ਲੋਕ ਗੱਲਾਂ ਕਰਨ ਵਾਲੇ ਹੌਤੇ ਬਣ ਗਏ ਆ। ਪ੍ਰੈਕਟੀਕਲ ਲੈਣ ਵਾਲੇ ਘੱਟ ਬਣ ਗਏ ਆ। ਇਹੋ ਆ ਤੇ ਸੰਤੂ ਮਹਾਰਾਜ ਪ੍ਰਤਾਪ ਸਿੰਘ ਜੀ ਵਾਦੀਏ ਦੋ ਜਹਾਨ ਨੇ ਤੁਹਾਡੇ ਸਾਹਮਣੇ ਇਹ ਦਿੱਥਿਆ ਉਹਨੇ ਮਨ ਨਾਲ ਹੀ ਰੱਖ ਦੇ ਭਾਈ ਤੋਂ ਦਰਦ ਲਿਖਿਆ ਬਾਹਰ ਕੇ ਅਗਨ ਜੂ ਬੁਝਾ ਜਾਣ ਸਰ ਤਬ ਨਾ ਹੂੰ ਮੈਂ ਲੱਗ ਆਂ ਵੀ ਕਹਦੇ ਕਾ ਬੁਝਾਈ ਐ ਬਾਹਰ ਤੇ ਬਾਗਿਓ ਡਲੀ ਜਿਹ ਤੇ ਕੋਟ ਘੜ ਘੜ ਦੇ ਜੋ ਲੂਟ ਲਈ ਜਾ ਕੋ ਬਾਹ ਜਾਇਆ ਚੋੜਨ ਕੇ मारे ਮਹੀ ਪਰ ਜੀਉ ਕੈਸੇ ਕੈ ਬੁਝਾਈਐ ਮਾਇਆ ਦਰ ਦਰ ਪਤ ਹਾਰ ਗੁਰਦੁਆਰੇ ਜਾਐਹਾਹਾ ਜੋ ਵਿਅਤ ਮਾ ਕਹਾ ਝਰ ਰਹੀਐ ਕਹਦੇ ਲਾਵਾ ਚਲਦੀ ਏ ਨਦੀ ਵਿੱਚ 베ੜੀ ਤੇ 베ੜੀ ਤੇ ਪਾ ਜਾਂਦੇ ਨੇ ਬੰਦੇ ਤੇ ਇੱਕ ਅੱਗ ਲੱਗ ਜਾਂਦੀ ਏ ਬਾਹਰ ਨਦੀ ਚ ਪਾਰ ਕੋਠੇ ਨੂੰ ਲੱਗ ਗਈ ਐ ਅੱਗ ਪਾਰ ਜਿਹੜੀ ਕੋਠੇ ਨੂੰ ਅੱਗ ਲੱਗੀ ਆ ਉਹ ਨਦੀ ਦਾ ਪਾਣੀ ਪਾ ਕੇ ਬੁਝਾ ਲਿਆ ਪਾਣੀ ਛਿੜ ਕੋਠੇ ਦੀ ਅੱਗ ਬੁਝਾ ਦੇਾਂਗੇ ਪਰ ਜਿਹੜੀ ਲੋਕਾਂ ਨਦੀ ਦੇ ਵਿੱਚ ਤੁਰੇ ਜਾਂਦੀ ਐ ਉਹਨੂੰ ਅੱਗ ਲੱਗ ਤੇ ਦੱਸੋ ਕਿਸ ਤਰ੍ਹਾਂ ਬੁਝਾਵਾਂਗੇ ਪਾਣੀ ਪਾਵਾ ਵੀ ਹੋਣਾ ਬੁਝਾਗੇ ਨਾ ਹੁਮਾ ਨਾ ਗਾਇਆ ਕਿੱਥੇ ਦਾ ਬੁਝਾ ਜਿਆ ਕਹਿੰਦੇ ਨੇ ਕਾਦਰੀ ਕਦਾ ਬੜੋ ਆਦਮਾ ਕਿਰੇ ਵਿੱਚ ਜਾਂਦਾ ਤੇ ਮੇਰੇ ਅੱਗੇ 200 ਪੈਸੇ ਇਹ ਕਿਰਪਾ ਕੀਤੀ ਆ ਗਿਆ ਉਹਦੇ ਨਾਲ ਸਾਰਾ ਬੱਦੋ ਤੋਂ ਡਰ ਕੇ ਆਦਮੀ ਰਾਜੇ ਦੀ ਸਰ ਨੂੰ ਜਾਂਦਾ ਕਹਿੰਦਾ ਜੋਰ ਮੇਰੇ ਬਾਹਰ ਛੱਡ ਮੈਂ ਰਾਜੇ ਕੋ ਜਾਣਾ ਰਾਜੇ ਕੌਮੀ ਗੋਲੀ ਸ਼ੁਰੂ ਕਰ ਦਿੱਤੀ ਉਹਨੇ ਬਰਾਉਣੀ ਦੇ ਕੋਲ ਭਲਾ ਭਰਾ ਕਿੱਥੇ ਜਾ ਕੇ ਜੀ ਬਚਾਲਿਆ ਫਕੀਰ ਕਹਿੰਦੇ ਨੇ ਮਾਇਆ ਡਰ ਪਰ ਮਹਾਰ ਕੋਲ ਮਾਇਆ ਤੋਂ ਡਰ ਗਿਆ ਸੀ ਸਗਤ ਦੇ ਜਿਹਾ ਹੋਇਆ ਇੱਥੇ ਕਲ ਕੁੜੀ ਨਾਲ ਲੜ ਪਾ ਸਿੱਖੜੀ ਨਾਲ ਲੜ ਪਾ ਮੁੰਡੇ ਨਾਲ ਲੜ ਪਾ ਮਾਂ ਨਾਲ ਪਿਓ ਨਾਲ ਛਤਰੋ ਛਤਰੀ ਹੁੰਦੇ ਰਹਿਣੀਆਂ ਘਰਾਂ ਵਿੱਚ ਅਗਲ ਕੀ ਹੁੰਦੀ ਏ ਕਹਾਣੀ ਅਖੀ ਦਾ ਗੁਰਦੁਆਰੇ ਚ ਓਏ ਭਾਈ ਰਾ ਕੋਲ ਬਾਣੀ ਸੁਣਾ ਗਏ ਤੇ ਕੀਰਤਨ ਸੁਣਾ ਗਏ ਥੱਡ ਪੈ ਗਈ ਲੈ ਕਰੋ ਆਏ ਗੁਰਦੁਆਰੇ ਦੇ ਕੇ ਵੇਖਿਆ ਭਾਈ ਹੋਈ ਤੇ ਜੇਰੇ ਉੱਥੇ ਜਾ ਕੇ ਪਾਪ ਕਰਾਂਗੇ ਤਾਂ ਇਸ ਤਰ੍ਹਾਂ ਸਾਡੀ ਸੰਗਤ ਦਾ ਦਰਸ਼ਨ ਕਰਕੇ ਤੇ ਆਹਦੇ ਦੇ ਸਾਹਰ ਹਾਜ਼ਰ ਹਾਜ਼ਰ ਹਾਜ਼ਰ ਹਾਜ਼ਰ ਖਾਦਾ ਫਿਰ ਦਿਵਾਨ ਚਾਰ ਦਿਨ ਬਾਅਦ ਜਦੋਂ ਜਾਨਾ ਗੈਰ ਹਾਜ਼ਰ ਗੈਰ ਹਾਜ਼ਰ ਖਾਦਾ ਫਿਰ ਉਹਨਾਂ ਕਹਿੰਦੇ ਆਖਣਾ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਖਾਦਾ ਕਿਹਨੇ ਪੁੱਛਿਆ ਬਾਹ ਬਾਹ ਆਹ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਇਹਨਾਂ ਦੀ ਮਤਲਬ ਹੈ ਕਿ ਜਦੋਂ ਮਤਲਬ ਹੈ ਕਿ ਹਾਜ਼ਰ ਗੈਰ ਹਾਜ਼ਰ ਬੈਠੀ ਹੋ ਸੰਗਤ ਚ ਨੇ ਤੇ ਗੈਰ ਹਾਜ਼ਰ ਕਿ ਬਾਬਾ ਜੀ ਆਲਾ ਕਰਦੇ ਬੈਠਾ ਤੇ ਘੂਮਕ ਕਿਸੇ ਦੀ ਧੀ ਤਾਂ ਬੋਲੋ ਭੂਰੀ ਜਿਹਾ ਕਰਕੇ ਐਥੇ ਦੇਖਦੇ ਨੇ ਗੈਰ ਕੋਈ ਧੀ ਤਾਂ ਕਿਸੇ ਦੀ ਬੈਠੀ ਹੋ ਤੇ ਕੁਛ ਨਾ ਕੋਟੀਆਂ ਲਾ ਕੇ ਰੱਖਣ ਦੀ ਇੱਜੇ ਸੰਗਤ ਆਇਆ ਆ। ਜਾ ਕੇ ਨਾਂਮੇ ਲਾ ਰਿਹਾਗਾ ਫਿਰ ਨਗੀ ਪੈਰੀ ਆ ਦੇ ਨਾਲ ਗਿਆ ਤੇ ਸਾਰੇ ਕਹਿੰਦੇ ਹੈ ਕੌਣ ਤੱਕ ਲਾ ਗਿਆ ਮੁੰਡੇ ਰਿਓ ਤੇਰੀ ਤਾਂ ਉਸ ਸਾਖੀ ਨੇ ਰਈ ਆਈਏ ਤੇ ਦੇ ਉਹ ਸਮਾਹ ਦੇ ਸੁਣਨ ਦੇ ਦੇ ਸਾਖੀ ਵੀ ਆ ਜਾਣੇ ਅੰਦਰ ਸਾਲੇ ਪਰ ਤਾਂ ਇਹ ਵੀ ਆ ਕੇ ਬੰਗਿਆ ਨਾ ਵਾਲੇ ਕਹਾਂਦੇ ਹੋਣਗੇ ਉਹ ਧਾਰਾ ਸ੍ਰੀ ਕਾ ਵਾਲੇ ਸਾਰੇ ਜਿਹੜੇ ਸਾਧੂ ਮੱਥੇ ਬਾਦਸ਼ਾਹੇ ਦੇ ਦਰਸ਼ ਜਵਾਨ ਲੱਗ ਆਏਗਾ ਸੱਜਣਾ ਦਰਸ਼ ਕਰਦੀਆਂ ਹੋਣਗੀਆਂ ਮੇਰੇ ਖੁਦ ਨੂੰ ਕਰਦੇ ਹੋਣਗੇ ਉਹ ਤੁਹਾਡਾ ਤੋਂ ਮੇਰਾ ਬਾਰਦਨ ਕਰਨ ਤੋਇਆ ਸੰਗਤ ਵਿਚ ਆ ਕੇ ਤੁਹਾਨੂੰ ਕੋਈ ਨਾ ਕੋਈ ਸਿੱਖਣਾ ਚਾਹੀਏ ਇਹ ਸੰਗਤ ਨੇ ਕੀ ਆਖਿਆ ਯਥਾ ਕਥਾ ਗਤਾ ਯਥਾ ਆਤੋ ਦਰਨਾ ਗਤਾ ਸਾਨੂੰ ਕੋਈ ਨਾ ਕੋਈ ਸਾਇਰਾ ਚੋ ਇਸ ਪਾਸੇ ਸਾਧ ਜੀ ਸਤੂ ਸਤੇ ਪਾਸਾ ਜੀ ਨੇ ਬਾਹਰ ਕਹਦਾ ਕਹਦਾ ਤੇ ਮਹਾਰਾਜ ਆਪੇ ਕਹਿੰਦਾ ਜਨਾ ਮਹਾਰਾਜ ਤੁਹਾਨੂੰ ਆਇਆ ਮੈਂ ਮਹਾਰਾਜ ਦੇਖਿਆ ਨਹੀਂ ਤੇਰਾ ਐਡਾ ਮਹਾਰਾਜ ਜਿਹੜਾ ਦੇਖਿਆ ਨਾ ਤੇਰਾ ਤੇ ਮਹਾਰਾਜ ਦੇ ਨੇ ਜ਼ਰੂਰ ਆ ਕਹਿੰਦਾ ਮੈਂ ਨਹੀਂ ਜਾਣਾ ਮਰਦਾਵਾ ਕਹਿੰਦਾ ਮੈਂ ਨਹੀਂ ਜਾਣਾ ਬਾਲਾ ਕਹਿੰਦਾ ਔਰ ਤੂੰ ਨਹੀਂ ਜਾਣਾ ਅਰੇ ਨਹੀਂ ਜਾਣਾ ਉਹ ਸਭੂ ਜਾਂਦੇ ਉਹ ਰਾਜੇ ਨੇ ਬਾਮੜਾ ਦੇ ਰਾਜੇ ਦੇ ਦਿਲ ਹੁੰਦੇ ਨੇ ਉਹ ਬੋਧਿਆ ਮੰਨੂ ਕਿ ਤੇ ਸਿਓ ਜਾ ਕੇ ਰੇਤ ਪੱਥਰ ਤੇ ਰੱਬ ਕੱਢਣ ਆ ਰਹੇ ਤੈਨੂੰ ਦੇ ਕੋਲ ਮਹਾਰਾਜੇ ਦੇ ਕੋਲਾ ਆ ਕੇ ਬਾਹਰ ਗਿਆ ਤੇ ਮਹਾਰਾਜੇ ਨੇ ਮਰਦਾਨਿਆਂ ਤੋਂ ਕਿਉਂ ਚਲੇ ਜਾਂਦੇ ਜਾਦੇ ਗੜੀ ਨੂੰ ਬਾਲੇ ਬਾਲੇ ਅੱਜ ਤੇ ਦੇ ਤੇ ਦਸਦੇ ਆਉਂਦੇ ਨੇ ਮੁਕਰ ਦੇ ਨੇ ਅਜੇ ਆਉਂਦੇ ਨੇ ਤੇ ਜਾ ਕੇ ਕੋਹੜਿਆ ਦੇ ਕੋਹੜ ਦੂਰ ਹਟਾ ਦੇਵੇ ਸਾਡਾ ਜੇ ਅਸੀਂ ਤੂੰ ਮੁੱਢ ਕਦੀਵ ਦਾ ਯਾਰ ਸਾਡਾ ਮੈਂ ਯਾਰਾ ਗੁਰੂ ਨੇ ਜੇ ਲਿਆਏ ਆਏ ਅਰੇ ਵਿੱਚ ਕੋਈ ਇਰਦਿਆਰ ਸਾਡਾ ਤੇਰੇ ਨਾਲ ਵਰਤਾਂ ਰਿਆ ਤਨ ਸਾਨੂੰ ਤੂੰ ਦਿਲਦਾਰ ਆਪਰੇ ਦਾ ਇਹਨਾਂ ਨੂੰ ਪਤਾ ਵੀ ਜਾਣੇ ਚੰਗੇ ਕੇ ਕੇ ਮਾਰ ਕੇ ਤੇ ਆਪੇ ਛੇੜ ਪਰ ਫਲਾਫ ਨੂੰ ਕੇ ਤੈਨੂੰ ਕੰਮ ਲੈਣ ਦੀ ਚੰਗੀ ਜਾਜ ਹੈ ਮਾਰੇ ਕੇ ਮੇਰੇ ਮਦਾਨੇ ਆ ਇਹਨਾਂ ਕਰ ਮੰਨ ਲਿਆ ਕੋਈ ਖੜੇ ਹੱਥ ਹੌਸਲਾ ਵੀ ਕਰ ਹੋਏਗਾ ਪਰ ਜਿੱਥੇ ਨਾਮ ਨਾਮ ਲਿਆ ਜਾਏਗਾ ਉੱਥੇ ਨਾਲ ਬਰਦਾ ਮੇਰਾ 13 ਮਹੀਨਾ। ਫਿਰ ਇਹ ਜਦ ਜਿਹੜੇ ਲੈਟਰ ਉਹਦੇ ਨਾਲ ਕਰਦੇ ਜਿੱਥੇ ਗੁਰੂ ਪ੍ਰਤਾਪ ਸਿੰਘ ਦਾ ਨਾਮ ਲਿਆ ਜਾਏਗਾ ਉੱਥੇ ਨਾਲ ਪਾਈ ਫੀਕਾ ਵਿੱਚ ਜਿਹੜੀ ਹੋਏਗਾ ਵੀ ਸੂਬਾ ਦੇ ਚਰਨਾਂ ਵਿੱਚ ਆਇਆ ਸਰਬਾਈ ਪ੍ਰਕਾਸ਼। ਉੱਥੇ ਪੂਰਨ ਸੇਵਰੀ ਤੇ ਜੀ ਸੇਵਰੀ ਪਾਈ ਵਾਰਾ ਉਥੇ ਲਾਏ ਹੋਏਗਾ ਫਿਰ ਦਰਸ਼ਨ ਤੇ ਗਿਦਾਂ ਸਿੰਘ ਦੀ ਉਥੇ ਭਾਈ ਰਤਨ ਸਿੰਘ ਦੀ ਰਾਤ ਹੈ ਉਹ ਫਿਰ ਦਾ ਨਾਮ ਆਏਗਾ ਇਹਨਾਂ ਹਜ਼ੂਰੀ ਜੱਤੇ ਵਾਇਆ ਨਾਮ ਹੋਰ ਆ ਜਿੱਥੇ ਇਹਦਾ ਨਾਮ ਆਏਗਾ ਥੱਲੇ ਜਿੱਤੇ ਤੇ ਦਰਸ਼ਨ ਹੋਵੇ ਹੁਣ ਦੇਖੋ ਜੀ ਹਜ਼ਾਰਾਂ ਹਾਜ਼ਰ ਕਰਨੀਆਂ ਕੋਲ ਜਦੋਂ ਜਿਹੜੇ ਗੱਲ ਆਉਂਦੀ ਹੈ ਤੇ ਅਸੀਂ ਕੀ ਕਰਦੇ ਆ ਆਦਰੇ ਗਾਰ ਦੀ ਤਾਰ ਹੋਰ ਕੋਈ ਨਹੀਂ ਲਿਖਦਾ ਤੇ ਤਿਕਾਤਾ ਕੀ ਆ ਸਾਰੇ ਪੜਿਓ ਜੇ ਕੋਲ ਗੁਰੂ ਨਾਨਕ ਨਾਮ ਦੇ ਗਾਰ ਦੀ ਯਾ ਉਹ ਕੇ ਦਾ ਗਰੀਬ ਮੋਰ ਕੀ ਮੇਰੇ ਪਾੜੇ ਨਾਲ ਕਰ ਲੈ ਤੁਸੀਂ ਮੈਂ ਤੁਹਾਨੂੰ ਕਹਿੰਦੇ ਕਿ ਇਹਦਾ ਕੋਈ ਨਾ ਕੋਈ ਹੋਰ ਦਾ ਤੇ ਮੈਂ ਤੁਹਾਡੇ ਗਿਆਤ ਕਰਨਾ ਤੇ ਮੈਂ ਉਹਨਾਂ ਨੂੰ ਵੀ ਕਿਹਾ ਕਰਾਂਗਾ ਸਿੱਧੀ ਗੱਲ ਹੈ ਮੇਰੀ ਤੁਹਾਡੇ ਨਾਲ ਭਈ ਮੈਂ ਤੁਹਾਡੇ ਨਾਲ ਗੱਲ ਆ ਸਕਣਾ ਦੋ ਪਰ ਤੇ ਜੇ ਤੋ ਉਹ ਕਾਉਂਟੀ ਉਹਦਾਂ ਦੇ ਚੱਲਿਆ ਨਾ ਤੇ ਫੋਨ ਲਾ ਕੇ ਕਿਹਾ ਉਹ ਖੜੀ ਦਾ ਦਬਾਅ ਹੋ ਰਿਹਾ ਉਹ ਤੁਹਾਨੂੰ ਦੱਸਿਆ ਕਰ ਮੇਰੇ ਸਾਡੇ ਮੇਰੇ ਜਾਏ। ਦਾ ਇਹ ਬੜੀ ਹੋਈ ਕਿ ਗਰਾਸ ਦਾ। ਕੋੜੇ ਦੇ ਆਪ